ਵੇ ਦੇਖੋ ਸਹਿਤਰੀ ਸਾਹਿਬ ਆਏ ਕਹਿਣ ਲੱਗੇ ਕਿ 8 ਵਜੇ ਤੱਕ ਆ ਸੂਬਾ ਜਨੇ ਹੁਕਮ ਕੀਤਾ ਮੈਂ ਕਿਹਾ ਜੇ ਨਾਮ ਤਾਰੀ ਸਮਾਜ ਵਿੱਚ ਆ ਕੇ ਸਗਰੁ ਜਦੀਤ ਸਿੰਘ ਦੇ ਦੇ ਗੁਣ ਗਾਇਆ ਜਾਣ ਉਹਨਾਂ ਦੇ ਦਰਬਾਰ ਜੀ ਦਾ ਅੱਛੀ ਤਰ੍ਹਾਂ ਸੰਗੀਤ ਨਾ ਹੋਵੇ ਤੇ ਨਾ ਕਦਰਦਾਨ ਤੇ ਨਾ ਸੁਣਨ ਵਾਲਿਆਂ ਨੂੰ ਸੰਗੀਤ ਮਿਲ ਸਕਦਾ ਇਹਦੇ ਨਾਲ ਸਾਡੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਏ ਕਿ ਸਾਡੀ ਇਹਾ ਖੜ ਚਲੋ ਸਾਡੇ ਨਾਮ ਦਾ ਬਹੁਤ ਪੁਰਾਣੀ ਯਾਦ ਇਹਨਾਂ ਨੇ ਦਲਾ ਦਿੱਤੀ ਸਾਡੇ ਗੁਰੂ ਕਰਦੇ ਇਸ ਇਹਦੀ ਇਹ ਬੰਦਸ਼ਾ ਨੇ ਇਹ ਕਿੱਥੇ ਮਿਲਦੀਆਂ ਹੈਗੀਆਂ ਅੱਜ ਦੇ ਜ਼ਮਾਨੇ 'ਚ ਕਿਸੇ ਕੀਰਤਨ ਦਰਵਾਜ਼ਾ ਕਿਸੇ ਗੁਰਦੁਆਰੇ 'ਚ ਨਹੀਂ ਮੰਨਨ ਗਿਆ ਤਾਂ ਮੈਂ ਇਹੋ ਜੇ ਸਮੇਂ ਪ੍ਰਬੰਧਕਾਂ ਗਾ ਇਹ ਬੇਨਤੀ ਹੁੰਦੀ ਹੈ ਕੋਈ ਕੀਰਤਨ ਦੇ ਤੋਂ ਥੋੜੀ ਜਿਹੀ ਆ ਇੱਕ ਸਾਡਾ ਮੇਨ ਮਕਸਦ ਗੁਰਦਾਰੇ ਜਾਉਣ ਦਾ ਕੀਰਤਨ ਕਰਨਾ ਤੇ ਨਾਮ ਸਿਮਨ ਕਰਨ ਦਾ ਹੀ ਹੈਗਾ ਉਹ ਬਹੁਤ ਧੰਨਵਾਦ ਸੁਭਾਜੀ ਦਾ ਜਿਨ੍ਹਾਂ ਨੇ ਇਸ ਨੂੰ ਕੀਤਾ ਕਿਉਂਕਿ ਕੀਰਤਨ ਹੀ ਸਾਗੁਰਾਂ ਦੀ ਦੇਣ ਹੈ ਸੰਗੀਤ ਉਹਨਾਂ ਦੀ ਦੇਣ ਹੈ ਔਰ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਪਹਿਲਾਂ ਜੈਤਾਲ 'ਚ ਫਿਰ ਅਰਚੂਤਾਲਾ ਜੀ ਦੋ ਚੀਜ਼ਾਂ ਗਾਈਆਂ ਫਿਰ ਨਾਮthਰੀ ਸਟਾਈਲ ਦੀ ਇੱਕ ਚੀਜ਼ ਗਾਈ ਜਿਹੜੀ ਕਿ ਸਾਰੀ ਟ੍ਰੈਡੀਸ਼ਨਲ ਕੀਰਤਨ ਨਾਲ ਸੰਬੰਧ ਰੱਖਦੀਆਂ ਹਨ ਅਰੇ ਜੇ ਇੱਥੇ ਹੋਰ ਇੱਕ ਦਹਾ ਮਨਰਜ ਕਰਾਂਗਾ ਕਦੀ ਫੇਰ ਦਰਸ਼ਨ ਦੇਣ ਔਰ ਸੋ ਬਹੁਤ ਧੰਨਵਾਦ ਇਹ satsang ਜੋ ਸਗਰੂ ਦੀ ਕਿਰਪਾ ਬਗਰ ਨਹੀਂ ਹੋ ਸਕਦਾ ਮੈਂ ਨਤ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਤਿ ਸ੍ਰੀ ਅਕਾਲ